ਕਾਮ ਰੈਡੀ ਪਰ ਉਪਕਾਰ ਤਿੰਨ ਭੈ ਸਾਡੇ ਸਮਾਜ ਦੇ ਵਡੇਰਿਆਂ ਤੇ ਧਾਰਮਿਕ ਰਹਿਬਰਾਂ ਨੇ ਸਮਾਜ ਨੂੰ ਸਚਾਰੂ ਰੂਪ ਚ ਚਲਾਉਣ ਲਈ ਤਿੰਨ ਪ੍ਰਕਾਰ ਦੇ ਡਰ ਜਨ ਸਹਾਧਾਰਨ ਦੇ ਮਨ ਵਿੱਚ ਵਸਾਏ ਹਨ ਕਾਨੂੰਨ ਦਾ ਭੈ ਸਮਾਜ ਦਾ ਭੈ ਰੱਬੀ ਭੈ ਜਿਹੜੇ ਸਾਧਾਰਨ ਬੁੱਧੀ ਵਾਲੇ ਬੰਦੇ ਸਨ ਉਹਨਾਂ ਨੂੰ ਸਰਲ ਅਤੇ ਸਿੱਧਾ ਉਪਦੇਸ਼ ਸੀ ਕਿ ਗਲਤ ਕੰਮ ਕਰੋਗੇ ਪੁਲਿਸ ਫੜ ਕੇ ਲੈ ਜਾਵੇਗੀ ਸਰੀਰਕ ਕੁੱਟ ਤੋਂ ਇਲਾਵਾ ਕਾਨੂੰਨ ਅਨਸਾਰ ਜੇਲ੍ਹ ਦੀ ਹਵਾ ਖਾਣੀ ਪਵੇਗੀ ਤੀਖਣ ਬੁੱਧੀ ਵਾਲਾ ਕਹਿ ਦਿੰਦਾ ਸੀ ਕਿ ਸਫਾਰਿਸ਼ ਰਿਸ਼ਵਤ ਅਤੇ ਝੂਠੀ ਗਵਾਹੀ ਭਗਤੌਣ ਨਾਲ ਕੁਝ ਨਹੀਂ ਵਿਗੜਦਾ ਅਜਿਹੇ ਬੰਦਿਆਂ ਲਈ ਕਿਹਾ ਜਾਂਦਾ ਸੀ ਕਿ ਕਾਨੂੰਨ ਤੋਂ ਬਚ ਜਾਓਗੇ ਪਰ ਸਮਾਜ ਕੀ ਕਹੇਗਾ ਇੱਕ ਵਾਰੀ ਹਥਕੜੀ ਲੱਗ ਗਈ ਸਾਰਾ ਸਮਾਜ ਸ਼ੱਕ ਦੀ ਨਿਗਾ ਨਾਲ ਦੇਖੇਗਾ ਚਲਾਕ ਬੰਦੇ ਕਹਿ ਦਿੰਦੇ ਹਨ ਕਿ ਆਪਾਂ ਐਸੀ ਯੋਜਤ ਲੜਾਵਾਂਗੇ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਦੂਸਰੇ ਸਮਾਜ ਡਰਾਉਂਦਾ ਹੈ ਨਮਾਣਿਆ ਨੇ ਤਾਣਿਆ ਨੂੰ ਜਿਸ ਕੋਲ ਪੈਸਾ ਹੈ ਚਾਰ ਬੰਦੇ ਪਿੱਛੇ ਹਨ ਉਸ ਦਾ ਸਮਾਜ ਕੁਝ ਨਹੀਂ ਵਿਗਾੜ ਸਕਦਾ ਅਜਿਹੇ ਬੰਦਿਆਂ ਨੂੰ ਕਿਹਾ ਜਾਂਦਾ ਸੀ ਕਿ ਕਾਨੂੰਨ ਤੋਂ ਬਚ ਜਾਵੋਗੇ ਸਮਾਜ ਦੀਆਂ ਅੱਖਾਂ ਵਿੱਚ ਕੱਟਾ ਪਾ ਦੇਵੋਗੇ ਪਰ ਜੋ ਸਰਵ ਸ਼ਕਤੀਮਾਨ ਅੰਤਰਜਾਮੇ ਤੇ ਹਰ ਥਾਂ ਵਿਆਪਕ ਪਰਮੇਸ਼ਰ ਹੈ ਉਸ ਤੋਂ ਕਿਵੇਂ ਬਚੋਗੇ ਦੇਖਵਾੜ ਅਨਕ ਪਰਦੇ ਮੈਂ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਢੱਕੈ ਧਰਮਰਾਜ ਜਵਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ ਪ੍ਰਗਤੀਸ਼ੀਲ ਤੇ ਵਿਗਿਆਨਕ ਸੋਚ ਵਾਲੇ ਕਾਮਰੇਡਾਂ ਨੇ ਰੱਬੀ ਭੈ ਅਤੇ ਧਰਮਰਾਜ ਦਾ ਡਰ ਖਤਮ ਕਰਕੇ ਸਭ ਲਈ ਸੋਖ ਕਰ ਦਿੱਤੀ ਉਹਨਾਂ ਦਾ ਕਹਿਣਾ ਹੈ ਜਦ ਰੱਬ ਹੈ ਹੀ ਨਹੀਂ ਫਿਰ ਡਰ ਕਿਸ ਚੀਜ਼ ਦਾ ਇੱਕ ਵਾਰੀ ਕੁੰਭ ਦੇ ਮੇਲੇ ਤੇ ਅਲਾਹਾਬਾਦ ਪੰਡਿਤ ਜਵਾਰ ਰਾਲ ਨਹਿਰੂ ਜੀ ਗਏ ਸੀ ਕੁਦਰਤੀ ਉਸ ਦਿਨ ਨਾਗੇ ਸਾਧੂਆਂ ਨੇ ਤਰਬੇਣੀ ਇਸ਼ਨਾਨ ਕਰਨਾ ਸੀ ਨਾਗੇ ਸਾਧੂਆਂ ਦਾ ਝਗੜਾ ਹੋਣ ਨਾਲ ਖੂਨ ਖਰਾਬਾ ਹੋ ਗਿਆ ਅਤੇ ਪੰਡਤ ਜੀ ਦਾ ਪਾਰਾ ਸਮਾਨ ਚੜ ਗਿਆ ਪੰਡਤ ਜੀ ਨੇ ਬਿਆਨ ਦਿੱਤਾ ਇਹ ਧਰਮੋ ਧਰਮੋ ਨੇ ਹਮਾਰਾ ਮੁਲਕ ਬਰਬਾਦ ਕਰ ਦਿਆ ਮਤ ਕਿਸੇ ਧਰਮ ਕੋ ਮਾਨੋ ਬਸ ਅਨ ਪੈਦਾ ਕਰੋ ਔਰ ਦੇਸ਼ ਕੇ ਲਿए ਧਨ ਕਮਾਣਾ ਇਹ ਆਪਕਾ ਧਰਮ ਹੈ ਔਰ ਰਾਸ਼ਟਰ ਕੀ ਸੇਵਾ ਹੈ ਸਾਡੇ ਦੇਸ਼ ਦੇ ਸੰਸਾਰ ਪ੍ਰਸਿੱਧੀ ਵਾਲੇ ਮਹਾਨ ਚਿੰਤਕ ਡਾਕਟਰ ਰਾਧਾ ਕ੍ਰਿਸ਼ਨਨ ਦੇਸ਼ ਦੇ ਦੂਸਰੇ ਰਾਸ਼ਟਰਪਤੀ ਜੀ ਨੇ ਜਵਾਰ ਪੰਡਤ ਜਵਾਰ ਰਾਲ ਨਹਿਰੂ ਨੂੰ ਬਹੁਤ ਕਿਹਾ ਕਿ ਵਿਦਿਆਰਥੀ ਵਰਗ ਨੂੰ ਨੈਤਿਕਤਾ ਵੱਲ ਲਿਜਾਣ ਲਈ ਕੋਈ ਰੱਬੀ ਭੈਅ ਵਾਲੀਆਂ ਪਾਠ ਪੁਸਤਕਾਂ ਲਾਈਆਂ ਜਾਣ ਪਰ ਪੰਡਤ ਜੀ ਦਾ ਇੱਕੋ ਜਵਾਬ ਸੀ ਹਮ ਤੋ ਧਰਮ ਨਿਰਸਪੇਂਦਰ ਪ੍ਰੇਖ ਹੈ ਰੱਬੀ ਭੈਅ ਦਾ ਡਰ ਤਾਂ ਕਾਮਰੇਡੀ ਤਰਕਸ਼ੀਲਾਂ ਦੀ ਸੋਚ ਅਤੇ ਸਰਕਾਰੀ ਨਾਰੇ ਨੇ ਖਤਮ ਕਰ ਦਿੱਤਾ ਵੋਟ ਦੇ ਰਾਹ ਵਿੱਚ ਜਦ ਵੋਟਾਂ ਪਾਉਣ ਵਾਲਿਆਂ ਦਾ ਹਜੂਮ ਤੁਹਾਡੇ ਪਿੱਛੇ ਹੈ ਤਾਂ ਸਮਾਜ ਤੁਹਾਡਾ ਕੀ ਵਿਗਾੜੇਗਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਬਲਾਤਕਾਰ ਅਤੇ ਕਤਲ ਦੇ ਕੇਸ ਦੇ ਇਲਜ਼ਾਮਾਂ ਵਾਲਾ ਸਿਰਸੇ ਵਾਲਾ ਸਾਧ ਜਦ ਹਜੂਮ ਪਿੱਛੇ ਲਾ ਕੇ ਕਚਹਿਰੀ ਵਿੱਚ ਜਾਂਦਾ ਹੈ ਤਾਂ ਇੱਕ ਵਾਰੀ ਜੱਜ ਵੀ ਝੇਪ ਖਾ ਜਾਂਦਾ ਹੈ। ਬਾਕੀ ਰਹਿ ਗਿਆ ਕਾਨੂੰਨ ਇਸ ਤੋਂ ਡਰਨ ਦੀ ਕੀ ਲੋੜ ਹੈ? ਇਹ ਤਾਂ ਬਣਾਉਣਾ ਹੀ ਆਪਾਂ ਹੈ। ਜੈਸਾ ਸਾਡੇ ਹੱਕ ਵਿੱਚ ਹੋਵੇ ਵੈਸਾ ਬਣ ਜਾਵੇਗਾ। ਜੇ ਮੇਰੀ ਪਾਰਟੀ ਦਾ ਕਿਤੇ ਕੱਟ ਹੋਣਾ ਹੈ ਤਾਂ ਆਵਾਜ਼ਾਂ ਦੇ ਸਾਰੇ ਸਾਧਨ ਸਾਡੀ ਤਲੀ ਤੇ ਹਨ। ਜੇ ਵਿਰੋਧੀ ਧਿਰ ਨੇ ਕਿਤੇ ਵਿਖਾਵਾ, ਰੋਸ ਮਾਰ ਜਾਂ ਇਕੱਠ ਕਰਨਾ ਹੈ ਤਾਂ ਰਾਤੋ-ਰਾਤੀ ਦਫਾ 144 ਲਾਗੂ ਹੋ ਜਾਵੇਗੀ। ਹੁਕਮ ਨਿਕਲ ਜਾਵੇਗਾ ਕਿ ਕੋਈ ਬੰਦਾ ਬਸ ਦੀ ਛੱਤ ਤੇ ਨਹੀਂ ਬੈਠ ਸਕਦਾ। ਜਗਾ ਜਗਾ ਨਾਕੇ ਲਗਾ ਦਿੱਤੇ ਜਾਣਗੇ ਜੇ ਮੇਰੀ ਪਾਰਟੀ ਦੇ ਬੰਦੇ ਕੋਈ ਹਵਾ ਹਵਾਈ ਜਹਾਜ਼ ਹਾਈਜੈਕ ਕਰ ਲੈਣ ਤਾਂ ਬਹਾਦਰੀ ਵਾਲਾ ਕਾਰਨਾਮਾ ਹੈ ਅਤੇ ਪਾਰਟੀ ਵੱਲੋਂ ਪਾਰਲੀਮੈਂਟ ਦੀ ਚੋਣ ਜਿਤਾਈ ਜਾਂਦੀ ਹੈ ਜੇ ਉਹ ਕੰਮ ਕੋਈ ਹੋਰ ਕਰੇ ਤਾਂ ਅੱਤਵਾਦੀ ਅਤੇ ਦੇਸ਼ ਦੇ ਗद्दार ਕਹਿ ਕੇ ਗੋਲੀ ਨਾਲ ਵੜਾਇਆ ਜਾਂਦਾ ਹੈ ਜਾਂ ਜੇਲ੍ਹ ਭੇਜਿਆ ਜਾਂਦਾ ਹੈ ਨਕਸਲਵਾੜੀ ਲਹਿਰ ਦੇ ਕਾਰਕੁਨਾਂ ਨੂੰ ਕਾਮ ਸੋਚ ਵਧਿਆਉਂਦੀ ਨਹੀਂ ਠਾਕਦੀ ਪਰ ਸਿੱਖ ਖੜਕੂਆਂ ਨੂੰ ਅਨਪੜ ਜਾਹਲ ਮੌਕਾਪਰਸ ਲੁਟੇਰੇ ਅਤੇ ਬਲਾਤਕਾਰੀ ਕਰਨ ਨੂੰ ਕੋਈ ਸੰਕੋਚ ਨਹੀਂ ਕਰਦੀ ਸਟਾਲਿਨ ਪਿੱਛੋਂ ਜਦ ਖੁਰਸ਼ਚੋਵ ਅਤੇ ਸੋਵੀਅਤ ਯੂਨੀਅਨ ਸੰਘ ਦਾ ਪ੍ਰਧਾਨ ਬਣਿਆ ਸਟਾਲਿਨ ਪਿੱਛੋਂ ਜਦ ਖੁਰਸ਼ਚੋਵ ਸੋਵੀਅਤ ਸੰਘ ਦਾ ਪ੍ਰਧਾਨ ਬਣਿਆ ਅਤੇ ਪਾਰਲੀਮੈਂਟ ਵਿੱਚ ਸਟਾਲਿਨ ਵੱਲੋਂ ਜਨਤਾ ਉੱਤੇ ਢਾਏ ਗਏ ਜ਼ੁਲਮ ਵਰਣਨ ਕਰ ਰਿਹਾ ਸੀ ਤਾਂ ਇੱਕ ਸਲਿੱਪ ਉਸ ਕੋਲ कुछ ਕਿ ਸਟਾਲਿਨ ਦੇ ਸਮੇਂ ਤੁਹਾਡੀ ਮੌਜੂਦਗੀ ਕੁਰਸ਼ ਚੋਵ ਨੇ ਮੰਚ ਤੋਂ ਕਿਹਾ ਕਿ ਸਲਿੱਪ ਭੇਜਣ ਵਾਲੇ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ ਉੱਠ ਕੇ ਖੜਾ ਹੋ ਜਾਵੇ। ਵਾਰ-ਵਾਰ ਕਹਿਣ ਤੇ ਵੀ ਕੋਈ ਖੜਾ ਨਾ ਹੋਇਆ। ਇਸ ਤੇ ਕੁਰਸ਼ ਨੇ ਕਿਹਾ ਕਿ ਤੁਹਾਡੀ ਪੋਜੀਸ਼ਨ ਜੋ ਹੁਣ ਹੈ, ਇਹੀ ਹਾਲ ਮੇਰਾ ਸੀ। ਐਸਾ ਕਿਹੜਾ ਅਨੈਤਿਕਤਾ ਵਾਲਾ ਕੰਮ ਸੀ ਜੋ ਉਸ ਦੇਸ਼ ਵਿੱਚ ਨਹੀਂ ਹੁੰਦਾ ਸੀ। ਪਰ ਜਿਸ ਤਰ੍ਹਾਂ ਸਾਡੇ ਦੇਸ਼ ਦੇ ਬ੍ਰਾਹਮਣ ਦੀ ਕਿਤਾਬ ਕਹਿੰਦੀ ਹੈ ਕਿ ਬ੍ਰਾਹਮਣ ਸਰਵ ਹੈ, ਬਾਕੀ ਸਭ ਨੀਚ ਹਨ। ਇਸੇ ਤਰ੍ਹਾਂ ਕਮਿਊਨਿਜ਼ਮ ਦੀ ਲਾਲ ਕਿਤਾਬ ਕਹਿੰਦੀ ਹੈ ਕਿ ਕਮਿਊਨਿਸਟ ਸਭ ਦੁੱਧ ਧੋਤੇ ਹਨ ਬਾਕੀ ਸਭ ਪਲੀਤ ਹਨ ਗਾਰਬਾ ਚੋਵ ਦੇ ਰਾਜਕਾਲ ਸਮੇਂ ਰੂਸ ਵਿੱਚ ਪੁਚਾਲ ਨੇ ਬਹੁਤ ਤਬਾਈ ਮਚਾਈ ਮਨੁੱਖੀ ਆਧਾਰ ਤੇ ਯੂਰਪੀ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਡਾਕਟਰ ਦਵਾਈਆਂ ਤੇ ਹੋਰ ਸਮਗਰੀ ਸਹਾਇਤਾ ਲਈ ਭੇਜੀ ਗਈ ਅਖਬਾਰਾਂ ਵਿੱਚ ਖਬਰਾਂ ਆਈਆਂ ਕਿ ਵਿਦੇਸ਼ੀ ਤਾਂ ਲੋਕਾਂ ਦੀ ਸਹਾਇਤਾ ਵੇ ਜੁਟੇ ਹੋਏ ਸੀ ਪਰ ਬਹੁਤ ਸਾਰੇ ਦੇਸ਼ ਵਾਸੀ ਆਪਣੇ ਨੂੰ ਲੁੱਟਣ ਦੇ ਰੁਝੇ ਹੋਏ ਸੀ ਕਾਰਨ ਕਿਉਂਕਿ ਮਨਾਂ ਵਿੱਚੋਂ ਰੱਬੀ ਭੈਅ ਤੇ ਹੋਰ ਭੈਅ ਖਤਮ ਹੋ ਗਏ ਸਨ खालसा पंथ ਵਿੱਚ ਕੁਝ ਪੈਠ ਕਰਨ ਵਾਲੀ ਕਾਮਰੇਡੀ ਵਿਚਾਰਧਾਰਾ ਵੀ ਸਿੱਖੀ ਵਿਰੋਧੀ ਲਿਖਤਾਂ ਰਾਹੀਂ ਸਿੱਖਾਂ ਵਿੱਚੋਂ ਰਹਿੰਦੀ ਖੁੰਦੀ ਰੱਬੀ ਭੈ ਵਾਲੀ ਮਾਨਸਿਕਤਾ ਦਾ ਪੂਰਨ ਤੌਰ ਤੇ ਭੋਗ ਪਾਉਣਾ ਚਾਹੁੰਦੀ ਹੈ ਤਾਂ ਜੋ ਉਹਨਾਂ ਨੂੰ ਕੋਈ ਨੱਕ ਕਟਾ ਕਹਿਣ ਯੋਗਾ ਨਾ ਰਹੇ ਇਸ ਲਈ ਪੰਥਕ ਇਤਿਹਾਸ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਅਰਥਾਂ ਨੂੰ ਵਿਗਿਆਨ ਦੀ ਪੁੱਠ ਦੇ ਕੇ ਤਰੋੜ ਮਰੋੜ ਕੇ ਪੇਸ਼ ਕਰਨ ਵਿੱਚ ਜਿਸ ਦਾ ਸਬੂਤ ਅਸੀਂ ਸਭ ਦੁਸ਼ਟ ਝੱਖ ਮਾਰਾ ਅਤੇ ਕੌਤਕ ਕਾਮਰੇਡੀ ਸਿੱਖਾਂ ਦੀ ਕਿਤਾਬ ਚੰਗੀ ਤਰ੍ਹਾਂ ਦੇ ਦਿੰਦਾ ਹੈ ਗੁਰਬਾਣੀ ਦਾ ਫਰਮਾਨ ਹੈ ਮਨ ਕੁੰਚਰ ਪੀਲ ਗੁਰੂ ਗਿਆਨ ਕੁੰਡਾ ਗਿਆਨ ਕੁੰਡਾ ਮਨ ਕੁੰਚਰ ਪੀਲ ਗੁਰੂ ਗਿਆਨ ਕੁੰਡਾ ਜੈ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਇ ਅਰਥ ਮਨ ਇੱਕ ਹਾਥੀ ਹੈ ਮਹਾਵਤ ਗੁਰੂ ਹੈ ਅਤੇ ਮਹਾਵਤ ਰੂਪੀ ਗੁਰੂ ਕੋਲ ਗਿਆਨ ਰੂਪੀ ਕੁੰਡਾ ਅੰਕੁਸ਼ ਹੈ ਇਸ ਤਰ੍ਹਾਂ ਜਿੱਧਰ ਨੂੰ ਮਹਾਵਤ ਲੈ ਜਾਂਦਾ ਹੈ ਮੇਰਾ ਮਨ ਉੱਧਰ ਹੀ ਜਾਂਦਾ ਹੈ ਭਾਵ ਮੈਂ ਗੁਰੂ ਦੇ ਹੁਕਮ ਅਨੁਸਾਰ ਸਭ ਕੰਮ ਕਰਦਾ ਹਾਂ ਜਿਸ ਹਾਥੀ ਦੇ ਸਿਰ ਤੇ ਕਿਸੇ ਗੁਰੂ ਪੀਰ ਦਾ ਕੁੰਡਾ ਨਹੀਂ ਹੁੰਦਾ ਉਹ बार-बार ਉਸ ਰਸਤੇ ਤੇ ਜਾਂਦਾ ਹੈ ਜਿਸ ਦੇ ਅੰਤ ਦਾ ਕੋਈ ਥੋ ਪਤਾ ਨਹੀਂ ਹੈ ਪਰ ਦਾੜੀ ਕਿਸਾਂ ਵਾਲੇ ਕਾਮਰੇਡਾਂ ਦਾ ਤਰਕ ਹੈ ਕਿ ਅਸੀਂ ਤਾਂ ਹਾਥੀ ਅਸੀਂ ਤਾਂ ਹਾਥੀ ਹੈ ਹੀ ਨਹੀਂ ਸਾਨੂੰ ਗੁਰੂ ਅਤੇ ਗੁਰੂ ਦੇ ਗਿਆਨ ਦੀ ਕੀ ਲੋੜ ਹੈ ਅਸੀਂ ਲੂੰਬੜੀ ਤੋਂ ਚਲਾਕੀ ਲਈ ਅਤੇ ਸਭ ਦਾ ਪੂਛ ਲਾ ਕੇ ਸਵਾਗਤ ਕਰਦੇ ਹਾਂ ਅਤੇ ਆਪਣੇ ਮਾਲਕ ਦੇ ਪੱਕੇ ਵਫਾਦਾਰ ਹਾਂ ਕਾਲਾ ਇੰਦਰ ਸਿੰਘ ਘੱਗਾ ਤੇ ਸਪੋਕਸਮੈਨ ਦੀਆਂ ਲਿਖਤਾਂ ਤੋਂ ਸੁੱਤੇ ਸਿੱਧੀ ਇਹ ਸਿੱਧ ਹੋ ਜਾਂਦਾ ਹੈ ਜਦ ਸਪੋਕਸਮੈਨ ਨੂੰ ਸਿੱਖ ਵਿਰੋਧੀ ਗਤੀਵਿਧੀਆਂ ਬਾਰੇ ਕਾਲ ਤੱਕ ਤੇ ਸੱਦਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਪੱਤਰਕਾਰ ਹਾਂ ਮੈਨੂੰ ਤਖਤ ਤੇ ਤਖਤ ਸਾਹਿਬ ਤੇ ਤਲਬ ਕਰਨਾ ਪ੍ਰੈਸ ਦੀ ਆਜ਼ਾਦੀ ਦਾ ਗਲ ਘੁੱਟਣਾ ਹੈ ਆ ਸਾਡਾ ਕਹਿਣਾ ਹੈ ਕਿ ਜੇ ਤੂੰ ਪੱਤਰਕਾਰ ਹੈਂ ਤਾਂ ਪੱਤਰਕਾਰੀ ਪੱਤਰਕਾਰ ਹੀ ਰਹਿ ਤੂੰ ਸਿੱਖੀ ਵਿੱਚ ਟੰਗ ਕਿਉਂ ੜਾਉਂਦਾ ਹੈ ਇਹ ਉਹੀ ਗੱਲ ਹੋਈ ਕਿ ਬੜਕ ਕਿਉਂ ਮਾਰਦਾ ਹੈ ਕਿ ਮੈਂ ਸਾਨ ਹ ਬਈ ਫਿਰ ਤੂੰ ਮੋਕ ਕਿਉਂ ਮਾਰਦਾ ਹੈ ਉੱਤਰ ਮਿਲਿਆ ਕਿ ਗਊ ਦਾ ਜਾਇਆ ਹ ਕਾਮਰੇਡੀ ਪਰਵਕਾਰ ਮਾਦਾ ਪ੍ਰਸ਼ਤ ਕਾਮਰੇਡੀ ਸੋਚ ਦੇ ਧਾਰਨੀ ਤਰਕਸ਼ੀਲ ਬੰਦੇ ਧੂਆਂ ਧਾਰ ਪ੍ਰਚਾਰ ਕਰ ਰਹੇ ਹਨ ਕਿ ਅਸੀਂ ਤਾਂ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਅਗਿਆਨਤਾ ਵਾਲੇ ਜੀਵਨ ਵਿੱਚੋਂ ਕੱਢ ਕੇ ਵਿਗਿਆਨ ਦੇ ਲੜ ਲਾ ਕੇ ਲੋਕਾਂ ਨੂੰ ਸੁਚਾਰੂ ਜੀਵਨ ਦੀ ਸੇਧ ਦੇ ਕੇ ਮਨੁੱਖਤਾ ਤੇ ਪਰਵਕਾਰ ਕਰ ਰਹੇ ਹਨ ਦੂਰੋਂ ਦੇਖਿਆ ਇਹਨਾਂ ਦੀ ਕਾਰਜ ਸ਼ੈਲੀ ਅਤੇ ਪ੍ਰਚਾਰ ਤਰੀਕੇ ਨੂੰ ਦੇਖ ਕੇ ਆਮ ਬੰਦਾ ਇਹਨਾਂ ਦੀ ਪ੍ਰਸ਼ੰਸਾ ਕਰਨੋਂ ਨਹੀਂ ਰਹਿ ਸਕਦਾ ਪਰ ਜਦ ਅੰਦਰ ਵੱੜ ਕੇ ਵੇਖੀਏ ਤਾਂ ਅਸਲੀਅਤ ਸਾਹਮਣੇ ਆਉਂਦੀ ਹੈ ਕਿ ਮਨੁੱਖਤਾ ਤੇ ਕਿਹੋ ਜਿਹਾ ਪਰਵਕਾਰ ਕਰ ਰਹੇ ਹਨ ਇਹ ਮਾਮਲੇ ਵਿੱਚ ਛੋਟੀ ਜਿਹੀ ਉਦਾਹਰਨ ਅਸੀਂ ਪਾਠਕਾਂ ਨੂੰ ਪੇਸ਼ ਕਰ ਰਹੇ ਹਾਂ ਮਨਜੀਤ ਸਿੰਘ ਪੜ੍ਹਿਆ ਲਿਖਿਆ ਗੁਰਮੁਖ ਪਰਿਵਾਰ ਵਿੱਚੋਂ ਇੱਕ ਅੰਮ੍ਰਿਤਧਾਰੀ ਸਿੰਘ ਸੀ पूर्ण रहतवान ਨਿਤਨੇਮੀ ਅਤੇ ਧਰਮੀ ਬੰਦਾ ਸੀ ਜੇਬੀਟੀ ਕਰਕੇ करके स्कूल ਟੀਚਰ ਲੱਗ ਗਿਆ ਅਤੇ ਨਾਲ ਹੀ ਪੀਸੀਐਸ ਦੀ ਤਿਆਰੀ ਕਰਨ ਲੱਗਾ लगा, स्कूल ਇੱਕ एक ਗਰੁੱਪ ਸੀ ਅਤੇ ਕਾਮਰੇਡੀ ਟੋਲੇ ਦੇ ਗੁਰੂ ਨੇ ਮਨਜੀਤ ਸਿੰਘ ਦੇ ਸਕੂਲ ਵਿੱਚ ਪ੍ਰਵੇਸ਼ ਕਰਦਿਆਂ ਹੀ ठान ਲਿਆ ਕਿ ਇਸ ਜਥੇਦਾਰ ਦੀ ਕਿਰਪਾਣ ਲਵਾ ਕੇ ਇਸ ਦਾ ਸੁਧਾਰ ਕਰਨਾ ਹੈ ਸਮਾਂ ਲੰਘਦਾ ਗਿਆ ਕਾਮਰੇਡੀ ਗੁਰੂ ਮਨਜੀਤ ਸਿੰਘ ਨਾਲ ਨੇੜਤਾ ਵਧਾ ਕੇ ਆਪਣਾ ਪ੍ਰਚਾਰ ਕਰਦਾ ਰਿਹਾ ਮਨਜੀਤ ਲਿਖਤੀ ਇਮਤਿਹਾਨ ਪਾਸ ਕਰ ਲਿਆ ਪਰ ਇੰਟਰਵਿਊ ਵਿੱਚ ਰਹਿ ਗਿਆ ਤੇ ਨਿਰਾਸ਼ ਹੋ ਗਿਆ ਮੋਕਾ ਠੀਕ ਜਾਣ ਕੇ ਕਾਮਰੇਡੀ ਗੁਰੂ ਨੇ ਆਪਣਾ ਬਾਣ ਛੱਡਿਆ ਤੇ ਕਿਹਾ ਕੀ ਫਾਇਦਾ ਹੋਇਆ ਪਾਠ ਕਰਨ ਦਾ ਅਤੇ ਗੁਰਦੁਆਰੇ ਜਾ ਕੇ ਮੱਥੇ ਟੇਕਣ ਦਾ ਜੇ ਇਹੋ ਸਮਾਂ ਮਨ ਲਗਾ ਕੇ ਪੜ੍ਹਾਈ ਕਰਦਾ ਤਾਂ ਪਾਸ ਨਾ ਹੋ ਜਾਂਦਾ ਮਨਜੀਤ ਸਿੰਘ ਨੇ ਦੁਬਾਰਾ ਟੈਸਟ ਦਿੱਤਾ ਲਿਖਤੀ ਇਮਤਿਹਾਨ ਪਾਸ ਕਰ ਲਿਆ ਪਰ ਇੰਟਰਵਿਊ ਵਿੱਚ ਫਿਰ ਰਹਿ ਗਿਆ ਕਾਮਰੇਡੀ ਗੁਰੂ ਨੇ ਫਿਰ ਪਰਪਕਾਰ ਦਾ ਤੀਰ ਛੱਡਿਆ ਕਿਹਾ ਕਿੱਥੇ ਗਿਆ ਤੇਰਾ ਬਾਬਾ ਤੇ ਗ੍ਰੰਥ ਸਾਹਿਬ ਜਿਸ ਅੱਗੇ ਮੱਥਾ ਰਗੜਦਾਸ ਹੈ ਕਿੱਥੇ ਗਈਆਂ ਤੇਰੀਆਂ ਅਰਦਾਸਾਂ ਜਿਹੜੇ ਮੁੰਡੇ ਸਿਲੈਕਟ ਹੋਏ ਹਨ ਕਿੰਨਾ ਕੋ ਪਾਠ ਕਰਦੇ ਹਨ ਅਤੇ ਕਿੰਨਾ ਕੋ ਗੁਰਦੁਆਰੇ ਜਾ ਕੇ ਅਰਦਾਸਾਂ ਕਰਦੇ ਹਨ ਕਿੱਥੇ ਹੈ ਤੇਰਾ ਉਹ ਸਰਵ ਸ਼ਕਤੀਮਾਨ ਰੱਬ ਅੱਜ ਤੱਕ ਕਿਸੇ ਨੇ ਦੇਖਿਆ ਹੈ ਪਰਮੇਸ਼ਰ ਦੀ ਲੀਲਾ ਨਿਆਰੀ ਹੈ ਮਨਜੀਤ ਸਿੰਘ ਦਾ ਵਿਆਹ ਹੋ ਗਿਆ ਸਾਲ ਪਿਛੋਂ ਲੜਕੀ ਪੈਦਾ ਹੋਈ ਪਰ ਮਾਂ ਚਲਵਸੀ ਮਨਜੀਤ ਸਿੰਘ ਕੋਰ ਨਿਰਾਸ਼ਾ ਵਿੱਚ ਚਲਾ ਗਿਆ ਕਾਮਰੇਡੀ ਗੁਰੂ ਪੂਰਾ ਕਾਗ ਸੀ ਤਵਾ ਗਰਮ ਜਾਣ ਕੇ ਫਿਰ ਛੱਟ ਮਾਰੀ ਕੋਈ ਰੱਬ ਰੂਪ ਨਹੀਂ ਹੈ ਭਲਾ ਵੱਡੇ ਤਾਂ ਪਾਪ ਕਰਦੇ ਹਨ ਉਹਨਾਂ ਨੂੰ ਸਜ਼ਾ ਮਿਲਦੀ ਹੈ ਇਸ ਨਵਜਮੇ ਬੱਚੀ ਨੇ ਕੀ ਪਾਪ ਕੀਤਾ ਸੀ ਜੋ ਮਾਂ ਤੋਂ ਵਾਂਝੀ ਹੋ ਗਈ ਚੱਲ ਗੁਰਦੁਆਰੇ ਦੇ ਬਾਹਰ ਖੜ ਕੇ ਗਾਲਾਂ ਕੱਢ ਕੇ ਆਈਏ ਉਹ ਅਖੌਤੀ ਰੱਬ ਨੂੰ ਅਤੇ ਅਖੌਤੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਖ ਬੰਦੇ ਕਿਤਾਬ ਅੱਗੇ ਹੀ ਮੱਥੇ ਟੇਕ ਦਿੱਤੇ ਜਾਂਦੇ ਹਨ ਫਿਰ ਕਾਮਰੇੜੇ ਗੁਰੂ ਨੇ ਮੌਕਾ ਅੱਛਾ ਜਾਣ ਕੇ ਨਿਰਾਸ਼ਾ ਨੂੰ ਦੂਰ ਕਰਨ ਲਈ ਮਨਜੀਤ ਸਿੰਘ ਨੂੰ ਲਾਲ ਪਰੇ ਸ਼ਰਾਬ ਦਾ ਪੱਲਾ ਫੜਾ ਦਿੱਤਾ आहिस्ता आहिस्ता फिर ਕਾਮਰੇਡੀ ਪ੍ਰਚਾਰ ਰੰਗ ਲਿਆਉਣ ਲੱਗਾ ਪਹਿਲਾਂ ਮਨਜੀਤ ਸਿੰਘ ਨੇ ਗਾਤਰੇ ਦੀ ਕਿਰਪਾਨ ਉਤਾਰੀ ਫਿਰ ਗੁਰਦੁਆਰੇ ਜਾਣਾ ਤੇ ਨਿਤਨੇਮ ਕਰਨਾ ਬੰਦ ਕਰ ਦਿੱਤਾ ਘਰ ਦੇ ਨੇ ਮਨਜੀਤ ਸਿੰਘ ਦਾ ਦੂਸਰਾ ਵਿਆਹ ਕਰ ਦਿੱਤਾ ਘਰ ਵਾਲੀ ਪੜ੍ਹੀ ਲਿਖੀ ਸੀ ਤੇ ਆਈਟੀਆਈ ਤੋਂ ਸਟੈਨੋ ਦਾ ਕੋਰਸ ਕੀਤਾ ਹੋਇਆ ਸੀ ਕੋਰਸ ਕਰਦੇ ਸਮੇ ਉਸ ਦਾ ਇਨਸਟ੍ਰਕਟਰ ਵੀ ਪੱਕਾ ਕਾਮਰੇਡ ਸੀ ਜਿਸ ਨੇ ਉਸ ਤੇ ਭੀ ਨਾਸਤਿਕਤਾ ਕਾਮਰੇਡੀ ਟੋਲੇ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਸੀ ਚਾਹੁੰਦੇ ਸੀ ਕਿ ਮਨਜੀਤ ਸਿੰਘ ਕੇਸ ਵੀ ਕਤਲ ਕਰਵਾ ਦੇਵੇ ਇਸ ਲਈ ਮਹਿਫਲ ਵਿੱਚ ਸ਼ਰਾਬ ਦੀ ਮਾਤਰਾ ਵਧਾ ਦਿੱਤੀ ਹੁਣ ਮਨਜੀਤ ਸਿੰਘ ਦੇ ਮਨ ਚੋਂ ਨਾਮ ਬਾਣੀ ਦਾ ਰੰਗ ਪੂਰਨ ਤੌਰ ਤੇ ਉੱਤਰ ਕੇ ਕਾਮਰੇਡੀ ਰੰਗ ਚੜ ਚੁੱਕਾ ਸੀ ਫਿਰ ਭੀ ਉਸਨੇ ਕਾਮਰੇਡੀ ਗੁਰੂ ਦੇ ਵਾਰ-ਵਾਰ ਜ਼ੋਰ ਦੇਣ ਤੇ ਭੀ ਕੇਸ ਕਤਲ ਨਾ ਕਰਵਾਏ ਇਹਨੇ ਨੂੰ ਮਨਜੀਤ ਸਿੰਘ ਕਿਸੇ ਹੋਰ ਸਕੂਲ ਚਲਾ ਗਿਆ ਕਾਮਰੇਡੀ ਟੋਲੇ ਦੀ ਸੰਗਤ ਛੁੱਟ ਗਈ ਪਰ ਲਾਲਪਰੀ ਦਾ ਸਿੱਖ ਬਣ ਗਿਆ ਲਗਾਤਾਰ ਕਈ ਕਈ ਦਿਨ ਘਰੇ ਪਿਆ ਪੀਵੀ ਜਾਵੇ ਕਦੇ ਸਕੂਲੋਂ ਛੁੱਟੀ ਹੋਣ ਪਿੱਛੋਂ ਹਮ ਗਲਾਸਾਂ ਨਾਲ ਮਿਲ ਕੇ ਲੋਟ-ਪੋਟ ਹੋ ਕੇ ਅੱਧੀ ਰਾਤ ਘਰ ਮੁੜੇ ਕਦੇ ਤੜਕਸਾਰ ਮੁੜੇ ਕਦੇ ਆਪਣਾ ਸਕੂਟਰ ਛੱਡ ਦੇਵੇ ਕਦੀ-ਕਦੀ ਗਿਰਿਆ ਪਿਆ ਹੋਵੇ ਅਤੇ ਘਰ ਵਾਲੀ ਵਿਚਾਰੀ ਬਾਹਰੋਂ ਲੈ ਕੇ ਆਵੇ ਦੂਸਰੇ ਵਿਆਹ ਤੋਂ ਦੋ ਲੜਕੇ ਹੋਏ ਵੱਡਾ ਲੜਕਾ ਬਾਹਰ ਕਾਲਜ ਵਿੱਚ ਪੜਨ ਲੱਗਾ ਜੋ ਕਿ ਇੱਕ ਦਿਨ ਕਾਲਜ ਗਿਆ ਮੁੜ ਕੇ ਵਾਪਸ ਨਹੀਂ ਆਇਆ ਅਤੇ ਘਰ ਵਿੱਚ ਮਾਤਮ ਗਿਆ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਫਿਰ ਪਰਮੇਸ਼ਰ ਦੀ ਖੇੜ ਵਰਤੀ ਆਪਣਾ ਘਰ ਗੁਰਦੁਆਰੇ ਦੇ ਕੋਲ ਬਣਾ ਕੇ ਰਹਿਣ ਲੱਗ ਪਏ ਕਾਮਰੇੜੀ ਗੁਰੂ ਰਿਟਾਇਰ ਹੋ ਗਿਆ ਸੰਗਤ ਬਦਲ ਗਈ ਜਮਾਨੇ ਦੇ ਥਪੇੜੇ ਖਾਂ ਦੀ ਘਰ ਵਾਲੀ ਗੁਰਦੁਆਰੇ ਜਾਣ ਲੱਗ ਪਈ ਅਤੇ ਸਹਿਜ ਪਾਠ ਵੀ ਕਰਨ ਲੱਗ ਪਈ ਮਨਜੀਤ ਸਿੰਘ ਦੀ ਸ਼ਰਾਬ ਵੀ ਘਟ ਗਈ ਕਦੇ-ਕਦੇ ਲਗਾਤਾਰ 2-2 ਮਹੀਨੇ ਨਹੀਂ ਪੀਂਦਾ ਅਤੇ ਕਦੇ ਜਦ ਠੀਕ ਹੁੰਦਾ ਤਾਂ ਸਹਿਜ ਪਾਠ ਵੀ ਕਰ ਲੈਂਦਾ ਹੈ ਪਰ ਫਿਰ ਜਦ ਕਾਮਰੇੜੀ ਸਿੱਖਿਆ ਦਾ ਪਾਇਆ ਲਾਲਪਰੀ ਦਾ ਚਾਸ ਉੱਠਦਾ ਹੈ ਫਿਰ ਕਈ-ਕਈ ਦਿਨ ਪੀਂਦਾ ਰਹਿੰਦਾ ਹੈ ਇਹ ਹੈ ਕਾਮ ਰੈਡੀ ਤਰਕਸ਼ੀਲ ਟੋਲੇ ਦਾ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢ ਕੇ ਸਿੱਧੇ ਰਸਤੇ ਪਾਉਣ ਦਾ ਪਰਉਪਕਾਰ ਕਾਮ ਰੈਡੀ ਭਾਸ਼ਾ ਵਿੱਚ ਇਸ ਨੂੰ ਸੁਧਾਰ ਕਹਿੰਦੇ ਹਨ ਅਤੇ ਫਖਰ ਨਾਲ ਕਹਿੰਦੇ ਹਨ ਕਿ ਮੈਂ ਜੀਵਨ ਵਿੱਚ ਇਤਨੇ ਬੰਦੇ ਸੁਧਾਰ ਦਿੱਤੇ ਇਸ ਲਈ ਗੁਰਬਾਣੀ ਵਾਰ-ਵਾਰ ਚੇਤਾਵਨੀ ਜਿੰਦੀ ਹੈ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ ਵਾਸਨਕਾਰੋ ਪਰਸੀਐ ਤੋ ਕਛ ਲੱਗੈ ਦਾਗ